ਆਪਣਾ ਬਿਸਤਰ ਵਿਛਾ ਲਓ ਅਤੇ ਉਸ ਉੱਤੇ ਆਰਾਮ ਨਾਲ ਸ਼ਵਾਸਨ ਵਿੱਚ ਲੇਟ ਜਾਓ ਜਿਸ ਜਗ੍ਹਾ ਯੋਗ ਨਿਦਰਾ ਕਰੋ ਉਹ ਜਗ੍ਹਾ ਸ਼ਾਂਤ ਤੇ ਕਾਂਤ ਹੋਣੀ ਚਾਹੀਦੀ ਹੈ ਤਾਂ ਕਿ ਤੁਹਾਨੂੰ ਕਿਸੇ ਕਿਸਮ ਦੀ ਡਿਸਟਰਬੈਂਸ ਨਾ ਹੋਵੇ ਮੌਸਮ ਸਾਧ ਆਪਣੇ ਤੇ ਕਪੜਾ ਲੈ ਲਓ ਸਰਦੀ ਹੈ ਤਾਂ ਪਾਰਾ ਕਪੜਾ ਗਰਮੀ ਹੈ ਤਾਂ ਪਤਲਾ ਜੇ ਬਿਨਾ ਕਪੜਾ ਲਿਆ ਹੀ ਚੱਲਦਾ ਹੈ ਤਾਂ ਬਹੁਤ ਵਧੀਆ ਸਭ ਤੋਂ ਪਹਿਲਾਂ ਸਰੀਰ ਨੂੰ ਟਿੱਲੇ ਛੱਡਦੇ ਹੋਏ ਸਿੱਧੇ ਲੇਟ ਜਾਓ ਪੈਰਾਂ ਦਾ ਫਾਸਲਾ 1.5 ਦੋ 2 ਫੁੱਟ ਕਰ ਲਓ ਬਾਹਾਂ ਅਤੇ ਹੱਥਾਂ ਨੂੰ ਸਰੀਰ ਤੋਂ 5 ਇੰਚ 6 ਇੰਚ ਦੀ ਦੂਰੀ ਤੇ ਕਰ ਲਓ ਹੱਥਾਂ ਦੀਆਂ ਤਲੀਆਂ ਆਸਮਾਨ ਵੱਲ ਮੁਠਾਂ ਹੱਦ ਖੁੱਲੀਆਂ ਅੱਖਾਂ ਕੋਮਲਤਾ ਨਾਲ ਬੰਦ ਕਰ ਲਓ ਹੁਣ ਮੈਂ ਆਪ ਜੀ ਨੂੰ ਸਭ ਤੋਂ ਪਹਿਲਾਂ ਸ਼ਵਾਸਨ ਸ਼ੁਰੂ ਕਰਵਾ ਰਿਹਾ ਹਾਂ ਚਾਰ ਪੰਜ ਲੰਮੇ ਸਵਾਸ ਪਰੋ ਅਤੇ ਛੱਡੋ ਸਵਾਸ ਬਹੁਤ ਹੀ ਧੀਰ ਨਾਲ ਪਰੋ ਅਤੇ ਛੱਡੋ ਇਹ ਸਵਾਸ ਲੈਂਦੇ ਹਨ ਛੱਡਦੇ ਦੀ ਆਵਾਜ਼ ਤੁਹਾਡੇ ਕੰਨਾਂ ਤੱਕ ਵੀ ਨਾ ਪਹੁੰਚੇ ਬਹੁਤ ਹੀ ਧੀਰ ਨਾਲ ਲੰਮਾ ਸਵਾਸ ਪਰੋ ਅਤੇ ਲੰਮਾ ਸਵਾਸ ਹੌਲੀ ਹੌਲੀ ਛੱਡੋ ਹੁਣ ਮੈਂ ਜਿਵੇਂ ਜਿਵੇਂ ਆਪ ਜੀ ਨੂੰ ਬੇਨਤੀ ਕਰਾਂ ਆਪ ਜੀ ਨੇ ਮੇਰੇ ਕਹਿ ਅਨਸਾਰ ਆਪਣੀ ਸੁਰਤੀ ਨੂੰ ਆਪਣੇ ਸਰੀਰ ਦੇ ਵੱਖਰੇ ਵੱਖਰੇ ਅੰਗਾਂ ਤੇ ਲੈ ਕੇ ਜਾਣਾ ਹੈ ਅੱਖਾਂ ਬੰਦ ਹੀ ਰਹਿਣਗੀਆਂ ਅਤੇ ਨਾ ਹੀ ਉਸ ਅੰਗ ਨੂੰ ਹਿਲਾਉਣਾ ਹੈ ਜਿਸ ਮੈਂ ਨਾਮ ਲਵਾਂ ਕੇਵਲ ਆਪਣੀ ਅੰਤਰਮੁਖੀ ਆਤਮਾ ਨਾਲ ਹੀ ਉਹ ਸੰਗ ਨੂੰ ਦੇਖਣਾ ਹੈ ਅੱਖਾਂ ਖੋਲ ਕੇ ਉਹ ਸੰਗ ਨੂੰ ਬਿਲਕੁਲ ਨਹੀਂ ਦੇਖਣਾ ਅਤੇ ਨਾਲ ਹੀ ਅਨੁਭਵ ਕਰਨਾ ਹੈ ਜਿਸ ਅੰਗ ਤੇ ਆਪ ਜੀ ਆਪਣੀ ਸੁਰਤੀ ਨੂੰ ਲੈ ਕੇ ਗਏ ਹੋ ਉਹ ਅੰਗ ਬਹੁਤ ਹੀ ਪਾਰਾ ਮੁਰਦੇ ਦੇ ਸਮਾਨ ਤੇ ਬਿਲਕੁਲ ਬੇਜਾਨ ਹੋ ਚੁੱਕਾ ਹੈ ਉਸ ਵਿੱਚ ਕੋਈ ਜਿੰਦ ਜਾਨ ਨਹੀਂ ਰਹੀ ਸਭ ਤੋਂ ਪਹਿਲਾਂ ਆਪਣੀ ਸੁਰਤੀ ਨੂੰ ਖੱਬੇ ਪੈਰ ਤੇ ਲੈ ਜਾਓ ਅਨੁਭਵ ਕਰੋ ਕਿ ਖੱਬਾ ਪੈਰ ਬਹੁਤ ਹੀ ਟੱਲਾ ਬਹੁਤ ਹੀ ਪਾਰੀ ਇਸ ਵਿੱਚ ਕੋਈ ਜਿੰਦ ਜਾਨ ਨਹੀਂ ਹੁਣ ਆਪਣੀ ਸੁਰਤੀ ਨੂੰ ਸੱਜੇ ਪੈਰ ਤੇ ਲੈ ਆਓ ਸੱਜਾ ਪੈਰ ਬਹੁਤ ਪਾਰੀ ਪੈ ਗਿਆ ਹੈ ਬਹੁਤ ਹੀ ਢਿੱਲਾ ਬਹੁਤ ਹੀ ਸ਼ਾਨ ਤੁਹਾਡੇ ਹਲਾਇਆਂ ਵੀ ਨਹੀਂ ਹਿਲ ਸਕਦਾ ਇਤਨਾ ਪਾਰੀ ਦੋਵੇਂ ਪੈਰ ਪੱਥਰ ਦੀ ਛਿਲ ਵਾਂਗ ਪਾਰੇ ਬੇਜਾਨ ਹੋ ਗਏ ਹਨ ਹੁਣ ਆਪਣੀ ਸੁੱਤੀ ਨੂੰ ਖੱਬੇ ਹੱਥ ਤੇ ਲੈ ਜਾਓ ਹੁਣ ਆਪਣੀ ਸੁਰਤੀ ਨੂੰ ਸੱਜੇ ਹੱਥ ਤੇ ਲੈ ਆਓ ਹੁਣ ਆਪਣੀ ਅੰਤਰਮੁਖੀ ਆਤਮਾ ਨਾਲ ਖੱਬੇ ਕੰਨ ਨੂੰ ਦੇਖੋ ਹੁਣ ਆਪਣੀ ਸੁਰਤੀ ਨੂੰ ਸੱਜੀ ਅੱਖ ਤੇ ਲੈ ਜਾਓ ਹੁਣ ਆਪਣੇ ਸੁਰਤੀ ਨੂੰ ਖੱਬੇ ਗੋਡੇ ਤੇ ਲੈ ਜਾਓ ਹੁਣ ਆਪਣੇ ਤਿਆਨ ਨੂੰ ਆਪਣੇ ਕਮਰ ਤੇ ਲੈ ਜਾਓ ਰੀੜ ਦੀ ਹੱਡੀ ਉੱਤੋਂ ਲੈ ਕੇ ਥੱਲੇ ਤੱਕ ਸਾਰੀ ਕਮਰ ਬਿਲਕੁਲ ਬੇਜਾਨ ਇਸ ਵਿੱਚ ਕੋਈ ਜਾਨ ਨਹੀਂ ਹੁਣ अपनी ਸੂਤੀ ਨੂੰ ਖੱਬੇ ਪੈਰ ਤੇ ਲਗਾਓ ਹੁਣ ਆਪਣੀ ਸੂਤੀ ਨੂੰ ਸੱਜੀ ਹਰਕ ਤੇ ਲੈ ਆਓ ਹੁਣ ਆਪਣੇ ਧਿਆਨ ਨੂੰ ਆਪਣੇ ले ਤੇ ਲੈ ਜਾਓ ਸਾਰਾ ਸਿਰ ਪਿੱਛੋਂ ਤੋਂ ਲੈ ਕੇ ਅੱਗੇ ਤੱਕ ਬਿਲਕੁਲ ਸ਼ਾਂਤ ਹੁਣ ਆਪਣੇ ਧਿਆਨ ਨੂੰ ਹੁਣ ਆਪਣਾ ਧਿਆਨ ਆਪਣੀ ਸ਼ਾਦੀ ਤੇ ਲਿਆਓ ਸ਼ਾਦੀ ਦਾ ਸਜਾ ਪਾਗ ਫਿਰ ਖੱਬਾ ਪਾਗ ਹੁਣ ਆਪਣੀ ਸੁਰਤੀ ਨੂੰ ਆਪਣੇ ਚਿਹਰੇ ਤੇ ਲਿਆਓ ਸਾਰਾ ਤੇਰਾ ਬਿਲਕੁਲ ਸ਼ਾਨ ਟੱਲਾ ਕਿਤੇ ਤਨਾ ਨਹੀਂ ਹੁਣ ਆਪਣੀ ਸੂਤੀ ਨੂੰ ਆਪਣੇ ਨੱਕ ਤੇ ਲਿਆਓ ਹੁਣ ਆਪਣੀ ਸੂਤੀ ਨੂੰ ਆਪਣੇ ਸਵਾਸ ਤੇ ਲਿਆਓ ਸਵਾਸ اندر ਜਾ ਰਿਹਾ ਹੈ ਸਵਾਸ ਬਾਹਰ ਆ ਰਿਹਾ ਹੈ ਇਸ ਤੇ ਕੋਈ ਕੰਟਰੋਲ ਨਹੀਂ ਮਹਿਸੂਸ ਕਰੋ ਹਰ ਅੰਦਰ ਜਾਣ ਵਾਲਾ ਸਵਾਸ ਨੱਕ ਦੇ ਅੰਦਰੂਨੀ ਪਾਗ ਨੂੰ ਸਪਰਸ਼ ਕਰਦਾ ਹੋਇਆ ਅੰਦਰ ਜਾ ਰਿਹਾ ਹੈ ਹਰ ਬਾਹਰ ਆਉਂ ਵਾਲਾ ਸਵਾਸ ਨੱਕ ਦੇ ਅੰਦਰੂਨੀ ਪਾਗ ਨੂੰ ਸਪਰਸ਼ ਕਰਦਾ ਹੋਇਆ ਬਾਹਰ ਆ ਰਿਹਾ ਹੈ ਕੇਵਲ ਆਪਣੇ ਸਵਾਸ ਨੂੰ ਹੀ ਅਨੁਭਵ ਕਰਦੇ ਰਹੋ ਸਵਾਸ ਅੰਦਰ ਜਾ ਰਿਹਾ ਹੈ ਸਵਾਸ ਬਾਹਰ ਆ ਰਿਹਾ ਹੈ ਨਾਸਕਾ ਦੁਆਰਾ ਦੇ ਅੰਦਰੂਨੀ ਪਾਗ ਨੂੰ ਸਪਰਸ਼ ਕਰਦਾ ਹੋਇਆ ਸਵਾਸ ਅੰਦਰ ਜਾ ਰਿਹਾ ਹੈ। ਸਵਾਸ ਬਾਹਰ ਆ ਰਿਹਾ ਹੈ। ਆਪਣੀ ਸੁਰਤੀ ਨੂੰ ਕੇਵਲ ਸਵਾਸਾਂ ਤੇ ਟਿਕਾਈ ਰੱਖੋ। ਸਵਾਸ ਆ ਰਿਹਾ ਹੈ, ਸਵਾਸ ਜਾ ਰਿਹਾ ਹੈ। ਲੇਟੇ ਲੇਟੇ ਤੁਹਾਡਾ ਸਾਰਾ ਸਰੀਰ ਬਹੁਤ ਪਾਰੀ ਹੋ ਚੁੱਕਾ ਹੈ ਮੁਰਦੇ ਦੇ ਸਮਾਨ ਬਹੁਤ ਹੀ ਪਾਰੀ ਇਤਨਾ ਪਾਰੀ ਹੋ ਚੁੱਕਾ ਹੈ ਕਿ ਜ਼ਮੀਨ ਫਟ ਰਹੀ ਹੈ ਤੁਹਾਡਾ ਪਾਰੀ ਸਰੀਰ ਉਸ ਵਿੱਚ ਹੌਲੀ ਹੌਲੀ ਤਸਰ ਰਿਹਾ ਹੈ ਬਹੁਤ ਪਾਰੀ ਸ੍ਰੀ ਜਮੀਨ ਵਿੱਚ ਤਸਦਾ ਜਾ ਰਿਹਾ ਹੈ ਜਮੀਨ ਫਟ ਰਹੀ ਹੈ ਹੌਲੀ ਹੌਲੀ ਤੁਹਾਡਾ ਸ੍ਰੀ ਥੱਲੇ ਤਸਦਾ ਜਾ ਰਿਹਾ ਹੈ ਤਸਦਾ ਜਾ ਰਿਹਾ ਹੈ